श्लोक मोहल्ला तीजा ए तन है रत्त तन जो शहरते अपने तिन तन लोभ रत ना होए तन की रेदा रत्त ने निकल दी जाई री ए तन नु सका लेवे ए कल लेवे गो कर लेवे गुरु अमरदास जी सारा शरीर है ए रत्त तो ना बने होया है बने नहीं सकदा ਇਹ ਤਨ ਸਭੋ ਰਾਤਾ ਹੈ ਰਾਤ ਬਿਨ ਕਾਨੂੰਨ ਹੋਏ ਰਾਤ ਬਿਨ ਤਨ ਭਣ ਕੇ ਵੀ ਜਾਂਦਾ ਜੇ ਬਣਿਆ ਹੋਇਆ ਰਤ ਦਾ ਜੋ ਰਤ ਨਿਕਲੂਗੀ ਨਿਕਲੂਗੀ ਨਿਕਲਦੀ ਰਹੂਗੀ ਜਾਂ ਨਿਕਲਨੀ ਰਤ ਬੰਦ ਹੋ ਗਈ ਮੱਡ ਡੋਜੂਗਾ ਨਾ ਕਰੋ ਅਕਲ ਦੀ ਗੱਲ ਕਰੋ ਭਗਤੀ ਅਕਲ ਦੀ ਗੱਲ ਹੈ ਮੂਰਖਾ ਮੂਰਖਾ ਦੇ ਪਾਸੇ ਨੂੰ ਨਹੀਂ ਜਾ ਰਹੀ ਇਹ ਤਨ ਸਭੋ ਰਾਤਾ ਹੈ ਰਾਤ ਬਿਨ ਤਨ ਹੋਈ ਜੋ ਸਹਿਰ ਤੇ ਤਿੰਨ ਤਨ ਲੋਭ ਰਤਨ ਹੋਈ ਅਸਲ 'ਚ ਲੋਭ ਨੂੰ ਰਤਨ ਨਹੀਂ ਉਹ ਨਹੀਂ ਚਾਹੀਦਾ ਸਰੀਰ ਦਾ ਰਤ ਚਾਹੀਦਾ ਹੈ ਜਿਹੜਾ ਲੋਭ ਰਤ ਹੈ ਉਹ ਨਹੀਂ ਚਾਹੀਦਾ ਉਹ ਦੂਜਿਆਂ ਦਾ ਖੂਨ ਨਹੀਂ ਚੂਸਣਾ ਚਾਹੀਦਾ ਆਪਣੇ ਸਰੀਰ ਦੇ ਖੂਨ ਬਿਨਾ ਤਾਂ ਸਰੀਰ ਬਚਣਾ ਹੀ ਨਹੀਂ ਸਰੀਰ ਚੱਲ ਰਹੀ ਨਹੀਂ ਸਰੀਰ ਜੰਦਾ ਹੀ ਨਹੀਂ ਉਹ ਵਿਦੇਹੀ ਦੀ ਗੱਲ ਕਰ ਰਹੇ ਔਰ ਦੇਹੀ ਦੀ ਕਰ ਰਹੇ ਇਹ ਨਹੀਂ ਸਮਝਾ ਰਹੇ ਫਿਰ ਆਇਆ ਪੜ ਤੇ ਨਿ ਬਾਟ ਕੇ ਦੂਜੇ ਸਰੀਰ ਤੇ ਲਿਆਉਂਦਾ ਨਾ ਸਭ ਕੁਝ ਬਾਹਰ ਲੈ ਲਈ ਕੀ ਕਿ ਨਾਲੇ ਏਥੇ ਜਿਹੜਾ ਆਦਿਆ ਨਾ ਜੀ ਸ਼ਬਦ ਤਨ ਇਹ ਇੱਕ ਜਗ੍ਹਾ ਤਾਂ ਟਿੱਪੀ ਲਾਤੀ ਇਹਨਾਂ ਨੇ ਬਾਕੀ ਜਗ੍ਹਾ ਬਿਨਾਂ ਟਿਪੀ ਤੋਂ ਲਿਖਿਆ ਇਹ ਤਨ ਸਭੋ ਰਤ ਹੈ ਰਤ ਨਾ ਹੋਏ ਇੱਥੇ ਟਿੱਪੀ ਹੈ ਬਾਕੀ ਜਗ੍ਹਾ ਜਿੱਥੇ ਤਨ ਆਉਂਦਾ ਉੱਥੇ ਬਿਨਾਂ ਟਿੱਪੀ ਤੋਂ ਲਿਖਿਆ ਜੀ ਤਨ ਨੂੰ ਤਾਂ ਟਿੱਪੀ ਹੋਏ ਸਕਦੀ ਇਹ ਤਾਂ ਵੈਸੇ ਗਲਤ ਹੈ ਤਨ ਤਾਂ ਇੱਕ ਵਚਨ ਹੋਵੇ ਤੇ ਬਹੁਵਚਨ ਹੋਵੇ ਟਿੱਪੀ ਦਾ ਮਤਲਬ ਵੀ ਨਹੀਂ ਰਹਾ ਲਗੇ ਇਹ ਛਾਪੇ ਦੀ ਇਥੇ ਵੀ ਗਲਤੀ ਹੈ ਜੀ ਆਹ ਇਹਨਾਂ ਵਿਦਵਾਨਾਂ ਦੀ ਮੂਰਖ ਹੈ ਨੇ ਛਾਪੇ ਦੀ ਗਲਤੀ ਕਰੂਗਾ ਛਾਪੇ ਨੇ ਕਿਹਾ ਆਪੇ ਛਾਪਦਾ ਨੇ ਟਿੱਪੀ ਲਾਈ ਹੋਊ ਜਾਣੀ ਕਬੀ ਤਨ ਕੀਣ ਹੋਏ ਜਾਏ ਜਿਉ ਬਹਿ ਧਾਤ ਸ਼ੁੱਧ ਹੋਏ ਕਿਉਂ ਹਰਕਾ ਭਉ ਦੁਰਮਤ ਮੈਲ ਗਵਾਈ ਜੇ ਢਾਰ ਹੋਵੇ ਨਾ ਢਾਰ ਅੰਦਰ ਪੈ ਪੈਜਵੇ ਤਨਖੀਣ ਹੋਏ ਆ ਜਿਹੜਾ ਤਨ ਹੈ ਨਾ ਤੇਰਾ ਅੰਦਰਲਾ ਹਾਥੀ ਮਨ ਤੋਂ ਮੈਗਲ ਆਪੇ ਖੁਰ ਜਾਂਦਾ ਹੈ ਧੂੜ ਬਣ ਜਾਂਦਾ ਇਹ ਵਿੱਚੋਂ ਹਾਥੀ ਆ ਹਾਥੀ ਤਾਂ ਲੋਭ ਰਤ ਹੋ ਜਵੇ ਨਿਬੇ ਹੋਏ ਸਿਕਾਉਣਾ ਮਨ ਨੂੰ ਹੈ ਮਨ ਦੇ ਵਿੱਚ ਜਿਹੜੇ ਰਸ ਖਸ ਨੇ ਇਹ ਨੇ ਪਰਮੇਸ਼ਰ ਦੇ ਪੈਜ ਰਹਿ ਕੇ ਤਨਖੀਣ ਹੋਏ ਲੋਵਨਾ ਦੇ ਵਿੱਚੋਂ ਜਾਏ ਜਿਉਂ ਦਾ ਸੰਤਲ ਤਾਤ ਸ਼ੁੱਧ ਹੋਏ ਤਿਉਂ ਹਰ ਕਾ ਭੌ ਦੁਰਮਤ ਮਨ ਅੜਗਦਾ ਜਿਵੇਂ ਬਸੰਤਰ ਅੱਗ ਦੇ ਵਿੱਚ ਤਾਤੂ ਕੋਈ ਵੀ ਪਾ ਦਈਏ ਤਾਤ ਬੱਕਰੀ ਦੂਜੀ ਬੱਕਰੀ ਅਟਵਾਡ ਹੋ ਜਾਂਦੀਆਂ ਨੇ ਇਸੇ ਤਰੀਕੇ ਨਾਲ ਹਰ ਕਾ ਜਿਹੜਾ ਹੈ ਦੁਰਮਤ ਨੂੰ ਮਨ ਤੋਂ ਅਟਗੜ ਮੈਨੂੰ ਖਵਾ ਦਿੰਦਾ ਮੱਕਰੀ ਕਰ ਦਿੰਦਾ ਛਾੜ ਦਿੰਦਾ ਇਹਨੂੰ ਦੁਰਮਤ ਦੀ ਮਾਰੇ ਤੇ ਦੁਰਮਤ ਇਹ ਸਭ ਤੋਂ ਪਹਿਲਾ ਔਗਣ ਹੈ ਜੀ ਗੁਰਮਤ ਨੇ ਪਹਿਲਾਂ ਦੁਰਮਤ ਨੂੰ ਮਾਰਨਾ ਹੈ ਜਿਹੜਾ ਜਿਹੜਾ ਦੁਰਮਤ ਨਹੀਂ ਮਰਦੀ ਉਹਨਾਂ ਦੀ ਭਗਤੀ ਸ਼ੁਰੂ ਹੀ ਨਹੀਂ ਹੋ ਸਕਦੀ ਬਕਾਣਾ ਗੱਲ ਇੱਕ ਸਭ ਪਹਿਲਾਂ ਚਾਹੀਦੀ ਹੈ ਜੀ ਬਿਲਕੁਲ ਇਹੀ ਮਾਰੂ ਗੁਰਮਤ ਨੇ ਦੁਰਮਤ ਨੂੰ ਮਾਰਨਾ ਪਹਿਲਾਂ ਹਾਂਜੀ ਨਾਨਕ ਤੇਜ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਨਾਨਕ ਉਹ ਉਹੀ ਜਨ ਸੋਹਣੇ ਨੇ ਇਹਨਾਂ ਨੂੰ ਹਰ ਰੰਗ ਲੱਗ ਗਿਆ ਹਰ ਰੰਗ ਚੜ ਗਿਆ ਹਰ ਰੰਗ ਨਾਲ ਰੰਗੇ ਗਏ ਨਾਨਕ ਤੇਜਨ ਸੋਹਣੇ ਜੋ ਸਤੇ ਹਰ ਰੰਗ ਲਾਏ ਜਿਨ੍ਹਾਂ ਨੇ ਆਪਣੇ ਆਪ ਨੂੰ ਹਰ ਦੇ ਰੰਗੋ ਚ ਰੰਗ ਲਿਆ ਉਹ ਜਨ ਸੋਹਣੇ ਉਹਨਾਂ ਤੋਂ ਲੋਭ ਜਿਹੜਾ ਹੈ ਉਹ ਖੀਨ ਹੋ ਗਿਆ ਹੈ ਰੰਗ ਚੜ ਤਾਂ ਇਹ ਜਿਸ ਤਰ੍ਹਾਂ ਮੈਨੂੰ ਲੱਗਦਾ ਇਸਲਾਮ ਵਾਲਿਆਂ ਕੋਲ ਵੀ ਇਹ ਗੱਲ ਅੱਧੀ ਹੈ ਉਹ ਜਦੋਂ ਕਿਸੇ ਵੀ ਜਾਨਵਰ ਦਾ ਫੜ ਕੇ ਹਲਾਲ ਕਰਦੇ ਆ ਦੱਸਿਆ ਦਸੀਗੀ ਆਪਣੇ ਮਨ ਨੂੰ ਹਲਾਲ ਕਰਕੇ ਇਹਦਾ ਲੋਵ ਰਤ ਕੱਢਣਾ ਉਹ ਕਾਲੇ ਰੰਗ ਦਾ ਮਨ ਕਾਲਾ ਹੀ ਹੈ ਕਾਲੇ ਰੰਗ ਦੇ ਬੱਕਰੇ ਦਾ ਕੱਢਦੇ ਆ ਉਹਨਾਂ ਨੂੰ ਮਨ ਲੱਗਦਾ ਗੱਲ ਅੱਧੀ ਕਿ ਸਮਝ ਆਈ ਅੱਧੀ ਕਿ ਨਹੀਂ ਆਉਂ ਊੜ ਠੀਕ ਹੈ ਔਰ ਇਸ ਸ਼ਲੋਕ ਨਾਲ ਭਗਤ ਫਰੀਦ ਜੀ ਦੇ ਸ਼ਲੋਕ ਨਾਲ ਆ ਸ਼ਲੋਕ ਦੁਬਾਰਾ ਆਉਂਦਾ ਗੁਰਬਾਣੀ ਚ ਫੇਰ ਦੁਬਾਰਾ ਉਹਨਾਂ ਨੂੰ ਕਿਹਾ ਹੋਇਆ ਨਾ ਹਲਾਲ ਹੋਇਆ ਹਲਾਲ ਲੱਗੇ ਜਾਏ ਨਾਨਕ ਦਰਦੀਦਾਰ ਉਹ ਤਾਂ ਦੱਸਿਆ ਨਾ ਸੱਚ ਕੀ ਕਾਤੀ ਸੱਚ ਸਭ ਘਾੜ ਘਾੜ ਦਤਿਸ ਕੀ ਅਫਰਫਾਨ ਸਭ ਦੇ ਆਸਾਨ ਦੇਖ ਆਪ ਹੋਵੇ ਲੋ ਲੋਭ ਰਤਬਾਰ ਨਿਕਲਦੀ ਹੋਏ ਹਲਾਲ ਲੱਗਾਂ ਅੱਕ ਜਾਏ ਨ ਸਮਾਏ ਪੂਰੀ ਕੋੜੀ ਅਦਾ ਤੇ ਲਿਖੀ ਹੋਈ ਕਿ ਉਹ ਏਸੇ ਭਾਵ ਤੇ ਲਿਖੀ ਮਨ ਜਿਹੜਾ ਹੈ ਇਨੂ ਨੂੰ ਹਲਾਲ ਕਰਨਾ ਕਿਸੇ ਬਾਹਰ ਕਿਸੇ ਜਾਨਵਰ ਨੂੰ ਨਹੀਂ ਜਾਣਦੇ ਉਹ ਵੀ ਸੀ ਉਹਨਾਂ ਨੇ ਵੀ ਟਕਵੰਜ ਹੋਰ ਸਲਾਂ ਦਾ ਬਣਾ ਲਿਆ ਬਚਣ ਵਾਸਤੇ ਠੀਕ ਹੈ ਜੀ ਹਾਂ ਜੀ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਪਿਆ ਭਗਤੀ ਭੰਡਾਰ RAM ਕਲੀ ਕੀ ਹੁੰਦੀ ਹੈ ਬੋਲ ਤੋਂ ਪਹਿਲਾਂ ਕਲੀ ਹੁੰਦੀ ਹੈ ਮਾਂ ਜਿਹੜਾ ਕਲੀ ਵਾਂਗੂ ਸੀ ਜਿਆ ਖੜਿਆ ਰਾਮ ਦੀ ਸ਼ਕਤੀ ਨਾਲ ਵਿੱਚੋਂ ਰਾਮ ਮਨ ਵਿਖਸਿਆ ਮਨ ਖਿੜ ਗਿਆ ਹਰਿਆ ਬਾਗ ਰਾਮ ਕਲੀ ਹੋ ਗਈ ਉਹ ਮਨ ਵਿਖਸਿਆ ਆ ਵਸ ਗਿਆ ਮਨ ਖਿੜ ਗਿਆ ਤਾਂ ਬਣਿਆ ਸ਼ਨਾਰ ਖਿੜਿਆ ਹੋਇਆ ਫੁੱਲ ਹੀ ਸੋਹਣਾ ਲੱਗਦਾ ਖਿੜਿਆ ਹੋਇਆ ਫੁੱਲ ਸ਼ਨਾਰ ਚਨਾਰ 'ਚ ਖਿੜਿਆ ਹੋਇਆ ਫੁੱਲ ਭਾਈ ਦਾ ਹੁੰਦਾ ਆਪੇ ਸ਼ਨਾਰ ਬਣ ਗਿਆ ਗੁਰ ਕੈ ਸ਼ਬਦ ਕਾਵਲ ਵਿਖਸਿਆ ਗੁਰੂ ਪ੍ਰਦੇਸ਼ ਨਾਲ ਕਮਲ ਜਿਹੜਾ ਹੈ ਉਹਦਾ ਸੀ ਬੰਦ ਸੀ ਬਿਲਕੁਲ ਗਿਆ ਵਿਕਾਸ ਹੋ ਗਿਆ ਤਾਂ ਸੌਂਪਿਆ ਭਗਤ ਭੰਡਾਰ ਬਸ ਫਕੀ ਦਾ ਭੰਡਾਰ ਸੌਂਪ ਦੇ ਟਾਕੀ ਬਸ ਅੰਦਰੋਂ ਹੋਣ ਲੱਗ ਗਿਆ ਸਰ ਗੁਰੂ ਪ੍ਰਗਟ ਹੋ ਗਿਆ ਇੱਕ ਹੋਇਆ ਤੇ ਉਹ ਗਿਆ ਅੰਦਰੋਂ ਉਹ ਗਿਆ ਭਗਤੀ ਦਾ ਭੰਡਾਰ ਬਖਸ਼ਿਆ ਗਿਆ ਹਾਂਜੀ ਕੋਈ ਕਹਤਾ ਕਲੀ ਤੋਂ ਭਾਵ ਹੈ ਕਿ ਫੁੱਲ ਜਿਹੜਾ ਹੈਗਾ ਉਹ ਖਿੜਨਾ ਸ਼ੁਰੂ ਹੋਣ ਤੋਂ ਪਹਿਲਾਂ ਕਲੀ ਹੋ ਹੁੰਦੀ ਹੈ ਉਹ ਪਰ ਆਮੇ ਦਾ ਜੁੜਿਆ ਮੰਨ ਜਾ ਕੇ ਮੰਕਲੀ ਸੀ ਰਾਮਣਾ ਜੁੜਿਆ ਤਾਂ ਖੜ ਗਿਆ ਤੇ ਗੁਰਕੇ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਕ੍ਰਿਸ਼ਨੂ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਪਰਮ ਗਿਆ ਪਰਮ ਚਲਿਆ ਗਿਆ ਗੁਰਪਦੇਸ ਨਾਲ ਫਿਰ ਜਾਗਿਆ ਪਰਮਦੇ ਜਾਣ ਵਾਲੇ ਜਾਗ ਲਾਏ ਚੁੱਕਾ ਅਗਿਆਨ ਅਧਾਰ ਅੰਗਿਆ ਦੂਰ ਹੋ ਗਿਆ ਜੋ ਲੋਕਾਂ ਨੇ ਪਰਮਪਾਇਦੇ ਨਾਲ ਪਿਆਰ ਉਹਨੂੰ ਤਾਂ ਰੂਪ ਰੋਜ ਉਹਦੇ ਤੇ ਤਾਂ ਨਵਾਂ ਚੜਦਾ ਚ ਬੱਕਣ ਵਨ ਰੋਜ ਨਵੇਂ ਤੋਂ ਨਵਾਂ ਰੂਪ ਹੁੰਦਾ ਜਾਂਦਾ ਜਿਸ ਹਰ ਨਾਲ ਪਿਆਰ ਜਿਹਦਾ ਹਰ ਨਾਲ ਪਿਆਰ ਹੁੰਦਾ ਹੈ ਜਿਹੜਾ ਹਾਲ ਨਾਲ ਜੁੜਿਆ ਰਹਿੰਦਾ ਸ਼ਬਦ करता ਕਰਦਾ ਰਹਿੰਦਾ ਉਹਦਾ ਤਾਂ ਰੋਜੇ ਰੂਪ ਨੇ ਖੜਦਾ ਰਹਿੰਦਾ ਉਹਦਾ ਤਾਂ ਰੋਜੇ ਬਣ ਨਵੇਂ ਤੋਂ ਨਵਾਂ ਮਿਲਦਾ ਰਹਿੰਦਾ ਰੂਪ ਉਹਨੂੰ सदा ਮੇਰਾ ਨਿਤਨਮ ਸਦਾ ਸਦਾ ਦਾਤਾਰ ਹਾਂਜੀ ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭ ਹਾਰ ਸਦਾ ਜਿਹੜੇ ਆਪਣੇ ਪੈਰ ਨਾਲ ਸੋਬਾ ਬੰਤੀ ਨਾਰਾ ਉਹ ਹੀ ਸੋਬਾ ਬੰਤੀ ਨਾਰਾ ਉਹਦੀ ਸੋਬਾ ਹੋ ਸੰਸਾਰ ਮਨੁੱਖੀ cigarr ਨਾ ਜਾਣਣੀ ਮਨੁੱਖੀ ਨੂੰ ਨਹੀਂ ਪਤਾ cigarr ਦਾ ਉਹ ਤਾਂ ਬਾਹਰ ਜਨਮ ਹਾਰ ਕੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਸਮਝ ਆਈ ਅੰਦਰਲੇ cigarr ਬਾਹਰ ਕੰਨਾਂ ਦੇ ਵਿੱਚ ਕੁੰਡਲ ਪਾ ਲੈ ਸੋਨੇ ਦੇ ਉੱਤੇ ਲਾਲ ਜੜਲੇ ਬੜੇ ਬੜੇ ਕੀਮਤੀ ਚੋਲੇ ਕਲਗੀਆਂ ਲਾ ਲੀਆਂ ਉਸ ਆਵਿਹਾਰ ਤੇ ਕੇ ਲੈ ਜਾਣਗੇ ਜਨਮ ਜਿਹੜੇ ਜਾਂਦੇ ਨੇ ਜਾਂਦੇ ਰਹੇ ਨੇ ਇਹ ਗੱਲ ਕਹਿ ਰਹੇ ਨੇ ਹਾਂਜੀ ਹਰ ਭਗਤੀ ਸ਼ਿੰਗਾਰ ਕਰੇ ਬਿਨਾ ਬਾਣਾ ਪਾ ਲੈਂਦੇ ਨੇ ਸ਼ਿੰਗਾਰ ਬਣਾ ਲੈਂਦੇ ਨੇ ਬਾਣਾ ਪਾਉਂਦੇ ਨੇ ਬੜਾ ਸਾਫ ਸੁਥਰਾ ਹੋਰ ਕਈ ਤਰ੍ਹਾਂ ਦੇ ਸ਼ਿੰਗਾਰ ਲਾਉਂਦੇ ਨੇ ਭਗਤੀ ਹੈ ਜੀ ਫਿਰ ਕੀ ਹੈ ਸਤ ਜੰਮੇ ਹੋਏ ਖਾਰ ਪਰ ਨਿਤ ਜੰਮਦੇ ਮਰਦੇ ਰਹਿੰਦੇ ਨੇ ਖਾਰ ਹੁੰਦੇ ਰਹਿੰਦੇ ਨੇ ਹਾਂਜੀ ਸੰਸਾਰੇ ਵਿੱਚ ਸ਼ੋਭਾ ਨਾ ਪਾਇਨੀ ਜੇ ਕਰੈ ਸੋ ਕਰਤਾਰ ਨਾਨਕ ਸੱਚਾ ਏਕ ਹੈ ਸੰਸਾਰ ਸੰਸਾਰ ਤਾਂ ਉਹਦੀ ਸ਼ੋਭਾ ਹੁੰਦੀ ਨਹੀਂ ਕੋਈ ਵੀ ਨਹੀਂ ਚਾਹੀਦੇ ਸੰਸਾਰ ਤਾਂ ਸ਼ੋਭਾ ਕਰਦਾ ਨਹੀਂ ਹੁੰਦਾ ਲੈਣਾ ਦੋ ਚਾਰ ਦੋ ਚਾਰ ਹਜ਼ਾਰ ਆਦਮੀ ਕਰੀਆਵੇ ਕਰੀਆਵੇ ਸਾਰਾ ਸੰਸਾਰ ਨਹੀਂ ਸ਼ੋਭਾ ਕਰਦਾ ਹੁੰਦਾ ਅੱਗੇ ਜੇ ਕਰੈ ਸੋ ਜਾਣੈ ਕਰਤਾਰ ਅੱਗੇ ਇਹ ਸੋਬਾਉਣੀ ਕੀ ਹੋਣੀ ਹੈ ਕੀ ਨਹੀਂ ਹੋਣੀ ਕਿਹਨੇ ਕਰਨੀ ਅੱਗੇ ਉਹ ਤਾਂ ਸਰਦਾਰ ਨੂੰ ਨਾ ਪਰਦਾ ਪਰ ਸੰਸਾਰ ਜੀ ਨਹੀਂ ਹੁੰਦੀ ਸੰਸਾਰ ਤਾਂ ਹੁੰਦੀ ਕੀ ਹੋਣਾ ਕੀ ਨਹੀਂ ਇਹ ਕਰਤਾਰ ਜਾਣੇ ਨਾਨਕ ਸੱਚਾ ਏਕ ਹੈ ਸੰਸਾਰ ਨਾਨਕ ਜਿਹੜਾ ਸੱਚਾ ਹੈ ਜੇ ਦੋ ਨਾ ਉਹ ਸੰਸਾਰ ਉਹ ਜਮਨ ਬੰਚ ਜੇ ਚਿੱਤੀ ਵਿੱਚ ਹੈ ਦੋ ਚਿੱਤੀ ਚ ਉਹ ਸੰਸਾਰੀ ਜੀਵ ਹੈ ਜਿਹੜਾ ਇੱਕ ਹੈ ਉਹ ਨਿਰਾਕਾਰੀ ਹੈ ਉਹ ਸੱਚਾ ਉਹ ਦਰਗਾਹ 'ਚ ਬੈਠਾ ਉਹ ਨਹੀਂ ਇੱਥੇ ਰਹਿ ਜਿਹੜਾ ਮਨ ਚਿਤ 'ਚ ਵੰਡਿਆ ਹੋਇਆ ਹੈ ਸੰਤ ਸੰਤ 'ਚ ਵੰਡਿਆ ਹੋਇਆ ਉਹ ਸੰਸਾਰ ਵਿੱਚ ਆਇਆ ਜੀ ਉਹ ਸੰਸਾਰੀ ਜੀਵ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਤਾਰ ਚੰਗੇ ਪਾਸੇ ਮੰਦੇ ਪਾਸੇ ਆਪੇ ਲਾਇਨੇ ਕਰਨ ਜੇ ਆਪ ਕਰਤਾਰ ਉਹ ਕਰਦੇ ਜੋ ਕਰਤਾਰ ਕਰੂੰਗਾ ਹਾਂਜੀ ਇੱਥੇ ਆਪ ਤੋਂ ਕੀ ਭਾਵ ਲਵਾਂਗੇ ਚੰਗੇ ਬੰਦੇ ਆਪ ਵੀ ਇਹ ਮੰਨ ਕਰਕੇ ਹੀ ਚੰਗੇ ਬੰਦੇ ਲੱਗੇ ਹੋਏ ਆ ਜਿਹੜੇ ਅਸੀਂ ਚੰਗੇ ਬੰਦੇ ਕਲਮ ਕਹਿੰਦੇ ਕੁਛ ਉਹ ਚੰਗੇ ਕਰਮ ਅਸੀਂ ਆਪ ਨਹੀਂ ਕਰਦੇ ਅਸੀਂ ਚੰਗੇ ਸਾਡੇ ਜੋ ਅਸੀਂ ਤੁਹਾਨੂੰ ਕਰਨ ਆਏ ਜੇ ਉਹ ਨਹੀਂ ਕਰਦੇ ਬਾਕੀ ਸੰਸਾਰੀ ਕੰਮਾਂ ਚੰਗੇ ਬੰਦੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਉਹਦਾ ਬਹੁਤ ਸਾਰੇ ਬੰਦੇ ਖਬਰ ਸਾਤੇ ਖਰਤਾਰ ਵੀ ਖਰਾ ਚੰਗੇ ਵੀ ਖਰਤਾਰ ਖਰਾ ਲੈਂਦਾ ਉਹ ਸਾਡੇ ਲਿਖੇ ਚ ਨਹੀਂ ਆਉਂਦੇ अच्छा ਸਾਡੇ ਲੇਖੇ ਚ ਹੈ ਕਿ ਦੋਹੋਂ ਚ ਅਸੀਂ ਇੱਕ ਹੋਣਾ ਹੈ ਜੀ ਬਸ ਆਪਣੇ ਪੈਰ ਕੋਹੜਾ ਮਾਰਨਾ ਹੈ ਆਪਣਾ ਆਪਣੇ ਰੱਥੀ ਆਪਣਾ ਆਪਣੇ ਖਾਸ ਵਾਰਨਾ ਨਹੀਂ ਹੈ ਸਾਡੇ ਵਾਸਤੇ ਹਾਂਜੀ ਮਹਲਾ ਤੀਜਾ ਮਨ ਸਤਗੁਰ ਸੇਵੇ ਸ਼ਾਂਤਨਾ ਆਵਈ ਦੂਜੀ ਨਾਹੀਂ ਜਾਏ ਜੇ ਸਤ ਗੁਰ ਦੀ ਸੇਵਾ ਤੋਂ ਬਿਨਾਂ ਸ਼ਬਦ ਵਿਚਾਰ ਤੋਂ ਬਿਨਾਂ ਸ਼ਾਂਤੀ ਨਹੀਂ ਮਿਲ ਸਕਦੀ ਦੂਜੀ ਨਾਹੀਂ ਗਈ ਹੋਰ ਕੋਈ ਜਗ੍ਹਾ ਹੀ ਨਹੀਂ ਜਿੱਥੇ ਸ਼ਾਂਤੀ ਮਿਲ ਜਵੇ ਕੋਈ ਝੁਕੀਓ ਨਹੀਂ ਹੈ ਜਿੱਥੇ ਨਾ ਪਾਇਆ ਨਾ ਜਾਏ ਲੋਟਾ ਕਿ ਮਰਜੀ ਇਛਾ ਮੰਦ ਦੇ ਵਿੱਚ ਰੱਖੋ ਬਿਨਾਂ ਕਰਮ ਤੇ ਬਿਨਾਂ ਕੁਛ ਕਰੇ ਤੇ ਬਿਨਾਂ ਕਿਰਪਾ ਤੇ ਇਸ ਜਿਹੜੀ ਗੁਰਬਾਨੀ ਦਾ ਪੇੜ ਨੀ ਪਾਇਆ ਜਾ ਸਕਦਾ ਕਰੂਗਾ ਵਿਚਾਰੂਗਾ ਔਰ ਕਿਰਪਾ ਵੀ ਨਾਲ ਮੰਗੂਗਾ ਤੂੰ ਕਿਰਪਾ ਕਰੇ ਤਾਂ ਮੇਰੀ ਸਮਝ ਆਊਗੀ ਗੁਰਬਾਨੀ ਤੋਂ ਬੜੇ ਨੂੰ ਨਾ ਪੜੇ ਔਰ ਕਿਰਪਾ ਮੰਗੇ ਪਰਮੇਸ਼ਰ ਦੀ ਤੂੰ ਮੇਰੀ ਤੇ ਕਿਰਪਾ ਕਰਵੇਂ ਸਮਝ ਆਵੇ ਫਿਰ ਸਭ ਆ ਜੀ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ ਤਿੰਨ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁੱਖ ਪਾਇ ਅੰਦਰ ਲੋਭ ਵਿਕਾਰ ਹੈ ਅੰਦਰ ਦਾ ਲੋਭ ਹੈ ਔਰ ਦੂਜੇ ਪਾਇ ਖਾਇ ਭੁੱਖਾ ਮਾਇਆ ਦੀ ਹੈ ਆਪਣੇ ਆਪ ਦਾ ਆਪਣਾ ਆਪ ਨੂੰ ਭੁੱਲਿਆ ਫਿਰਦਾ ਆਪਣੇ ਆਪ ਤੋਂ ਹੀ ਖੋਇਆ ਫਿਰਦਾ ਆਪਣੇ ਮੂਲ ਨੂੰ ਖੋਈ ਬੈਠਾ ਆਪਣੇ ਮੂਲ ਨਾਲ ਹੀ ਜੰਮਣ ਮਰ ਨਾ ਚੁੱਕਈ ਐਸੇ ਲੋਕਾਂ ਨਾਲ ਜੰਮਣਾ ਬਲਣਾ ਕਦਮ ਨੀ ਹੋਇਆ ਹੋਇਆ ਕਰਦਾ ਤਮ ਨਹੀਂ ਹੋ ਸਕਦਾ ਹਮੇ ਵਿੱਚ ਦੁੱਖ ਪਾਣੀ ਉਹ ਹਮੇਲੇ ਵਿੱਚ ਰਹਿਣਗੇ ਔਰ ਦੁੱਖ ਪਾਉਂਦੇ ਹੀ ਰਹਿਣਗੇ ਹਾਂਜੀ ਜਿੰਨੀ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁੱਖ ਸਹਾਈ ਜੇਨ ਸਤਗੁਰ ਚਿਤ ਲਾਇਆ ਜੇਨ ਸਤਗੁਰ ਨਾਲ ਚਿਤ ਲਾਇਆ ਆਪਣੇ ਖਾਲੀ ਕੋਈ ਨਾ ਉਹ ਨਹੀਂ ਕੋਈ ਖਾਲੀ ਹੈ ਜਾਨ ਤੂੰ ਉਹਨਾਂ ਦੇ ਅੰਦਰ ਖਾਲੀ ਨਹੀਂ ਉਹਨਾਂ ਦੇ ਅੰਦਰ ਭਰਪੂਰ ਹੈ ਗਿਆਨ ਭਰਪੂਰ ਹੈ ਉਹਨਾਂ ਦੇ ਅੰਦਰ ਨਾਮ ਭਰਪੂਰ ਹੈ ਤੈਨੂੰ ਜਮ ਕੀ ਤਲਬ ਨਾ ਹੋ ਸਕਦਾ ਤਲਬ ਸਕਦਾ ਨਾ ਹੈ ਦੁੱਖਸਾਂ ਨਾ ਉਹਨਾਂ ਨੂੰ ਕੋਈ ਦੁੱਖ ਹੈ ਸਾਰਾ ਪਿੰਦਾ ਕੀ ਕਿਜੀ ਨਾਨਕ ਗੁਰਮੁਖੀ ਉਭਰੇ ਸੱਚੇ ਸ਼ਬਦ ਸਮਾਹ ਹੈ ਨਾਲ ਕਰ ਸੱਚੇ ਸ਼ਬਦ ਦੇ ਸਮਾਕੇ ਬਰਬਾਰੀ ਨੂੰ ਵਿਚਾਰ ਕੇ ਇਹਦੇ ਵਿੱਚ ਸਮਾਕੇ ਇਹਦੇ ਗਿਆਨ ਵਿੱਚ ਗੁਰਮੁਖੀ ਜਿਹੜੇ ਉਹ ਪਵ ਸਾਗਰ ਹੋ ਗਏ ਕੋ ਸ਼ਬਦ ਵਿੱਚ ਸਮਾਗੇ ਠੀਕ ਹੈ ਜੀ ਕੌੜੀ ਆਪ ਅਲਿਪਤ ਸਦਾ ਰਹਿ ਫੁਰ ਤੰਦਾ ਸਭ ਤਾਵੈ ਆਪ ਨਹਿਚਲ ਅਚਲ ਹੈ ਫੁਰ ਆਵੈ ਜਾਵੈ ਜਿਹੜਾ 1 ਹੈ ਉਹ ਸਦਾ ਆਪ ਲਿਪਤ ਨਹੀਂ ਮਾਇਆ ਦੇ ਲਿਪਤ ਨਹੀਂ ਹੁੰਦਾ ਹੋਰ ਤਾਂ ਸਭ ਤਾਵਨ ਬਾਕੀ ਜਿਹੜੇ ਦੋ ਟੁਕੜਿਆਂ ਚ ਨੇ ਜੋ ਜਿੱਤੀ ਵਿੱਚ ਨੇ ਉਹ ਆਉਣ ਜਾਣ ਤੇ ਰਹਿੰਦੇ ਨੇ ਧੰਦੇ ਚ ਮਾਇਆ ਦੇ ਧੰਦਿਆਂ ਚ ਤੌਂਦੇ ਰਹਦੇ ਨੇ ਜਨਮ ਲੈਂਦੇ ਆਪ ਨੇਚਲੇ ਅਕਾਲਾ ਹੈ ਆਪ ਉਹ ਨੇਚਲਾ ਇੱਕ ਜਿਹੜਾ ਹੈ ਉਹ ਨੇਚਲਾ ਅਕਾਲਾ ਹੈ ਹੋਰ ਆਉਣ ਜਾਵਣ ਬਾਕੀ ਜਿਹੜੇ ਹੋਰ ਨੇ ਜਿਨ੍ਹਾਂ ਦਾ ਮਾਲ ਹਨ ਭੰਗਾ ਹੈ ਇਨਾਂ ਦਾ ਮਨ ਭੰਗ ਹੈ ਉਹ ਹੌਣ ਜਾਣਦੇ ਨੇ ਫਸੇ ਰਹੇ ਹਾਂਜੀ ਸਦਾ ਸਦਾ ਹਰਤਿਆਈਏ ਗੁਰਮੁਖ ਸੁਖ ਪਾਵੇਂ ਨਿਜਕਰ ਵਾਸਾ ਪਾਈਏ ਸੱਚ ਸਿਫਤ ਸਮਾਵੇਂ ਸਦਾ ਸਦਾ ਹਰਤਿਆਈਏ ਇਸ ਕਰਕੇ ਸਦਾ ਸਦਾ ਹਰਤਿਆ ਨੂੰ ਜੋੜ ਕੇ ਰੱਖਣਾ ਚਾਹੀਦਾ ਆਪਣੇ ਅੰਤਰਾਤਮਾ ਨਾਲ ਧਿਆਨ ਜੋੜ ਕੇ ਰੱਖਣਾ ਚਾਹੀਦਾ ਗੁਰਮੁਖੀ ਸੁਖ ਪਾਈਏ ਇਸ ਤਰੀਕੇ ਨਾਲ ਜੋੜ ਕੇ ਗੁਰੂ ਸੁਖ ਪਾਇਆ ਨਿਜ ਘਰ ਵਾਸਾ ਭਾਈ ਹੈ ਸੱਚ ਸਿਰਤ ਸਵਾਮ ਹੈ ਇਹ ਹੀ ਨਿਜ ਘਰ ਵਾਸਾ ਆਪਣੇ ਮੂਲ ਨਾਲ ਜੁੜੇ ਰਹਿਣਾ ਆਪਣੇ ਅੰਤਰਾਤਮਾ ਨਾਲ ਜੁੜੇ ਰਹਿਣਾ ਨਿਜ ਘਰ ਵਾਸਾ ਹੈ ਭਾਈ ਨਿਜ ਘਰ ਵਾਸਾ ਪਾਇਆ ਹੋਇਆ ਹੁੰਦਾ ਸੱਚੀ ਸਿਰਤ ਸਵਾਮ ਸੱਚ ਦੀ ਸਿਵਤ ਕਰਕੇ ਸਿਰਤ ਵਿੱਚ ਸਮਾ ਜਾਇਦਾ ਗੁਣ ਕਾਇ ਗੁਣੀ ਸਵਾਮ ਗੁਣਾ ਦੇ ਰਾਤੇ ਵਿੱਚੇ ਸਮਾਜਿਆਦਾ ਉਹਦੇ ਖੁਣ ਗੌਂਦੇ ਗੌਂਦੇ ਹਾਂਜੀ ਸੱਚਾ ਗਹਿਰ ਗੰਬੀਰ ਹੈ ਗੁਰ ਸ਼ਬਦੀ 부ਝਾਈ ਸੱਚਾ ਤਾਂ ਗਹਿਰ ਗੰਬੀਰ ਹੈ ਉਹਦੀ ਗਹਿਰਾਈ ਦਾ ਤਾਂ ਤਾਂ ਹੀ ਨਹੀਂ ਉਹਦੀ ਗੰਬੀਰਤਾ ਤਾਂ ਤਾਂ ਹੀ ਗੁਰ ਸ਼ਬਦ 부ਝਾਈ ਇਹ ਗੁਰ ਸ਼ਬਦ ਤਾਂ ਇਹ ਚੀਜ਼ ਦੀ ਸੋਜੀ ਪਈ ਹੈ ਇਹ 부ਝਾਰਤ ਗੁਰ ਦੀ ਸਮਾਪਤੀ ਹੈ ਜੀ